ਵਿਆਨ ਉਹ ਬੋਲ ਆਪੇ বুঝ ਆਪੇ ਸੁਝਾ ਜਦ ਕਿ ਆਪਦੇ ਕਰੂੰ ਬੋਲਣਾ ਆਪੇ বুঝ ਜਾ ਕੀ ਬੋਲਦਾ ਉਹ ਸਮਝਦਾ ਵੀ ਆਪੇ ਹੈ ਅੱਛਾ ਜੀ ਜੋ ਬੋਲਦਾ ਉਹ ਆਪੇ ਸੁਝਦਾ ज्ञानवान ਜਦ ਬੋਲਦਾ ਆਪਣੀ ਨਾਲ ਨੂੰ ਕਬੂਲ ਕਰ ਬਹਾਦਰ ਸਮਝਦਾ ਮੈਂ ਕੀ ਕਹਿੰਦਾ ਦੂਜਿਆਂ ਨੂੰ ਜਾਇ ਪਤਾ ਲੱਗੇ ਚਾਇਦਾ ਲੱਗੇ ਗਿਆਨ ਉਹ ਬੋਲੇ ਆਪੋ বুঝਾ ਆਪੇ ਸਮਝੇ ਆਪੇ ਸੁਝਾ ਕਮਲ ਕਮ ਆਪਣੇ ਆਪ ਦਾ ਬੋਲਿਆ ਹੋਇਆ ਸਮਝ ਕੇ ਆਪਣੇ ਨਾਲ ਨੂੰ ਤਸਰਝਾ ਲੂਗਾ ਜੋ ਅੰਤਰ ਦੇਦਰ ਵਈਆ ਉਹ ਆਪ ਤਾਂ ਸੁਰਜ ਜਾਲੂ ਆਪਣੇ ਆਪ ਨੂੰ ਠੀਕ ਹੈ ਜੀ ਫਿਰ ਦੂਜੇ ਨੂੰ ਦੱਸ ਸਕਦਾ ਬਾਚ ਜਦ ਆਪ ਸੁਰਜ ਜੂ ਫਿਰ ਦੂਜੇ ਨੂੰ ਦੱਸ ਸਕਦਾ ਹਾਂਜੀ ਗੁਰ ਕਾ ਕਹਿਆ ਅੰਤ ਨਿਰਮਲ ਸੂਚੇ ਸੱਚੋ ਭਾਵੈ ਜਦ ਗੁਰ ਕਾ ਕਹਿਆ ਉਹਦੇ ਹਿੱਸੇ ਉਸ ਵਿੱਚ ਇਜਾਜ਼ਤ ਹੋ ਦੇ ਸਮਾ ਜਾਂਦਾ ਹੈ ਉਸ ਬੋਲਣ ਦਾੁਰ ਕੇ ਕਹਿ ਸਾਚਾਰ ਸੋਚ ਦੇ ਹੋਏ ਜਿੰਦੀਆਂ ਫੇਰ ਲੱਗਦੀ ਹਮ ਨਿਰਮਲ ਸੋਚੇ ਸਾਚੋ ਭਾਵ ਹੈ ਹੋ ਜਾਂਦਾ ਸੋਚਾ ਹੋ ਜਾਂਦਾ ਠੀਕ ਹੈ ਜੀ ਕਿਹਨੂੰ ਚੰਗੀ ਲੱਗਦੀ ਹੈ ਫਿਰ ਫਿਰ ਝੂਠ ਵੀ ਚੰਗਾ ਲੱਗਦਾ ਸੱਚੋ ਪਾਵੇ ਸੱਚੋ ਪਾਵੇ ਹਾਂਜੀ ਸੱਚੋ ਪਾਵੇ ਗੁਰ ਸਾਗਰ ਰਤਨੀ ਰਤਨ ਦੀ ਕੋਈ ਕਮੀ ਨਹੀਂ ਗੁਣਵੰਦੀ ਕੋਈ ਕਮੀ ਨਹੀਂ ਗੁਰ ਸਾਦਰ ਰਤਨੀ ਨਹੀਂ ਤੋੜ ਲਾਲ ਪਦਾਰਥ ਸਾਚ ਅਖੋਟ ਪਦਾਰਥ ਦੇ ਉਹ ਸਾਰੇ ਹੀ ਲਾਲ ਨੇ ਨਾਲ ਨੇ ਸਾਰੇ ਪਦਾਰਥ ਸਾਚ ਉਹਦਾ ਅਖੋਟ ਹੈ ਕੋਟਾ ਸੱਚ ਨਹੀਂ ਹੈ ਉੱਤੇ ਅਖੋਟ ਸੱਚ ਦੁਨੀਆਂ 'ਚ ਨਹੀਂ ਹੈ ਬਾਕੀ ਗ੍ਰੰਥਾਂ ਦਾ ਸੱਚ ਅਖੋਟ ਨਹੀਂ ਹੈ ਕੋਟਾ ਸੱਚ ਅਖੋਟ ਸੱਚ ਨੂੰ ਕੋਟ ਸੱਚ ਪ੍ਰਗਟ ਕਰਤਾ ਕਿ ਕਿ ਨੇ ਸਾਚੇ ਉਹ ਘੋੜਾਤੀ ਘੋੜਾ ਦਰ ਆਪਣੇ ਆਪ ਘੋਟੇ ਤੇ ਘੋੜਾ ਰਲ ਗਈ ਹਾਂ ਹਾਂ ਠੀਕ ਹੈ ਆ ਘੋੜਾਤੀ ਉਹਨਾਂ ਤੇ 12 ਨੂੰ ਪੁੱਛੀ ਕਹਿ ਤਰਨ ਦੀ ਇਸੂ ਦੇ ਨੂ ਤੇ ਜਿਹੜੀਆਂ ਲਿਖੀ ਜਾਂਦੀਆਂ 12 ਬਾਬਲ ਨਹੀਂ ਲਿਖੀ ਜਾਂਦੀਆਂ ਉਹ ਰਲ ਗਈ ਹਾਂ ਜੀ ਗੁਰ ਕਹਾ ਆਕਾਰ ਕਮਾਓ ਨਾਨਕ ਗੁਰਮਤਿ ਸਾਥ ਸਮਾਓ ਗੁਰ ਕਹਾ ਦਾਕਾਰ ਕਮਾਓ ਆਪਨ ਜੋ ਜੋ ਗੁਰਬਾਣੀ ਕਹਿੰਦੀ ਕਰ ਇਤਿਹਾਸਮਗਰ ਭਜਦੇ ਨੇ ਜ्यादा ਗੁਰ ਕੀ ਕਲਦੀ ਭਜਦੇ ਨੇ ਗੁਰ ਕੀ ਜੋ ਗਿਆ ਹੋਇਆ ਕਰਦੇ। ਉਹ ਜਿਹੜੇ ਬੜੇ ਬੜੇ ਲੀਡਰ ਬਣੇ ਫਿਰਦੇ ਨੇ ਨਾ ਉਹ ਇਤਿਹਾਸਮਗਰ ਉਹ ਉਲਟੇ ਰਾਹ ਪੈ ਨੇ ਪਰ ਮਤਲਬ ਨਾ ਪੰਕਤੀ ਪੜ੍ਹ ਲੈਣ ਕੀ ਲਿਖਿਆ ਹੋਇਆ ਹੈ। ਗੁਰ ਕੀ ਕਲਦੀ ਦੀ ਹੁੰਦੀ। ਤੋਦਰ। ਉਹ ਸੁਬੇ ਸਵੇਰ ਕਈ ਘੇੜਾਂ ਘੇੜਣੇ ਪੈਦੇ ਹੁੰਦੇ। ਹਰ ਸਵੇਰ ਕੋਈ ਜਾਲੀ ਪਤਾ। ਉਹ ਦਿਨ ਅਗਲ ਨਹੀਂ ਗੱਲ ਦੀ ਗੁਰ ਕਾਹਿਆ ਗੁਰ ਕੀ ਕਾਣੀ ਤਾਂ ਉਹਨਾਂ ਦਾ ਉਹ ਦਿਨ ਕਰਦੀ ਏ। ਅਗਲ ਹੀ ਕਰਦੀ ਜੋ ਸਾਨੂੰ ਅਪਦੇਸ਼ ਕੀਤਾ ਹੈ ਅਸੀਂ ਉਹ ਕਦੋਂ ਕਰਦੇ। ਮਾਨਨ ਗੁਰਮਤ ਸਾਤ ਗੁਰਬਤ ਬਦੜੀਏ ਗੁਰਬਤ ਲੈ ਕੇ ਸਾਚੀ ਕਿਸ ਗੋਜੋ ਠੀਕ ਹੈ